ਇਹਦਾ ਕੰਟਰੀਬਿਊਸ਼ਨ ਪਹਿਲੇ ਦਿਨ ਤੋਂ ਲੈ ਕੇ ਅੱਜ ਤੱਕ ਸੰਗੀਤ ਜਗਤ ਨੂੰ ਬੜਾ ਹੀ ਮਹੱਤਵਪੂਰਨ ਰਿਹਾ ਹੈ 1469 ਤੋਂ ਲੈ ਕੇ ਜੇ ਹੁਣ ਤੱਕ ਦੀ ਯਾਤਰਾ ਆਪਾਂ ਕਰ ਲਈਏ ਤੇ ਵੇਖਣ ਨੂੰ ਮਿਲੇਗਾ ਕਿ 뮤ਜ਼ਿਕ ਨੂੰ ਜਿਹੜੀ ਸਿਚੁਏਸ਼ਨ ਵਿੱਚ ਅੱਜ ਆਪਾਂ ਵੇਖ ਰਹੇ ਆ ਨਾ ਜਾਂ 뮤ਜ਼ਿਕ ਦੀ ਜਿਹੜੀ ਉਹ ਪਰੰਪਰਾ ਜਿਹਨੂੰ ਭਗਤੀ ਭਾਵਨਾ ਆਖਦੇ ਨੇ ਜਿਹੜੇ 뮤זיਕ ਨੂੰ ਮੰਦਿਰ ਜਾਂ ਗੁਰਦੁਆਰੇ ਵਿੱਚ ਪਚਾਇਆ ਜਾਂਦਾ ਹੈ ਜਿਸ 뮤זיਕ ਨੂੰ ਸ਼ਰਧਾ ਦੇ ਨਾਲ ਮੱਥਾ ਟੇਕਿਆ ਜਾਂਦਾ ਹੈ ਇਹਨੂੰ ਇਸ ਜਗ੍ਹਾ ਤੇ ਰੱਖਣ ਵਿੱਚ ਗੁਰੂ ਮਹਾਰਾਜ ਜੀ ਦਾ ਬੜਾ ਸਹਿਯੋਗ ਰਿਹਾ ਹੈ ਕੋਈ ਬਾਤੋਂ ਉੱਪਰ ਇਹੋ ਜਿਹਾ ਰਾਗ ਜਿਹੜੇ ਹਿੰਦੁਸਤਾਨੀ ਸ਼ਾਸਤਰ ਤੇ ਵਿੱਚ ਵੇਖਣ ਨੂੰ ਨਹੀਂ ਮਿਲਦੇ ਸੁਣਨ ਨੂੰ ਨਹੀਂ ਮਿਲਦੇ ਉਹ ਤਨ ਗੁਰ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਦਰਜ ਅੱਜ ਹਿੰਦੁਸਤਾਨੀ 뮤זיਕ ਨੂੰ ਇੱਕ ਨਵੀਂ ਸੇਧ ਦੇ ਰਹੇ ਨੇ ਅਗਲਾ ਪ੍ਰੋਗਰਾਮ ਉਸਤਾਦ ਸ਼ਿਰੀ ਸੁਰਜੀਤ ਸਿੰਘ ਜੀ ਜਿਨ੍ਹਾਂ ਨੇ ਆਪਣੀ ਮੂਡਲੀ ਦਿਖਿਆ ਉਸਤਾਦ ਜੀ ਹਰਪ੍ਰੀਤ ਸਿੰਘ ਜੀ ਤੇ ਅੱਜ ਇੱਥੇ ਆਡੀਅנס ਵਿੱਚ ਸ਼शोਭਤ ਹਨ ਸਰਦਾਰ ਗੁਰਦੇਵ ਸਿੰਘ ਜੀ ਉਹਨਾਂ ਦੇ ਕੋਲੋਂ ਦਿਲੂਬਾਦੀ ਸਿੱਖਿਆ ਲਈ ਤੇ ਨਾਲ ਹੀ ਸਰੰਗੀ ਦੀ ਜੋ ਸਿੱਖਿਆ ਜਿੱਥੇ ਆਪ ਜੀ ਅੱਜ ਆਪਾਂ ਸਾਰਿਆਂ ਨੂੰ ਇੱਕ ਇਹੋ ਜਿਹਾ ਮੂਡ ਵਿੱਚ ਲੈ ਕੇ ਜਾ ਰਹੇ ਨੇ ਜਿਹੜਾ ਸਿਰਫ ਇਸੇ ਇੱਕ ਸਾਜ਼ ਦੇ ਵਸ ਦੀ ਗੱਲ ਹੈ ਜਿਹਨੂੰ ਬਚਾਉਣ ਲਈ ਜਿਹਨੂੰ ਸਮਝਣ ਲਈ ਤਪੱਸਿਆ ਦੀ ਲੋੜ ਹੈ ਤੇ ਇਸ ਸਰੰਗੀ ਦੀ ਦੀਖਿਆ ਇਸ ਕਲਾ ਦੀ ਸਿੱਖਿਆ ਆਪ ਜੀ ਨੇ ਮਸ਼ਹੂਰ ਉਸਤਾਦ ਪੰਡਿਤ ਰਾਮ ਨਰਾਇਣ ਜੀ ਹੋਰਾਂ ਕੋਲੋਂ ਲਈ ਜਿਨ੍ਹਾਂ ਨੇ ਸਰੰਗੀ ਨੂੰ ਸੋਲੋ ਬਣਾ ਕੇ ਇੱਕ ਸੋਲੋ ਇਨਸਟਰੂਮੈਂਟ ਬਣਾ ਕੇ ਇਸ ਦੁਨੀਆ ਦੇ ਵਿੱਚ ਇਸ ਅੱਜ ਦੇ ਮਾਹੌਲ ਦੇ ਵਿੱਚ ਇਹਨੂੰ ਇਸਟੈਬਲਿਸ਼ ਕੀਤਾ ਰਾਗ ਸਰਵਨ ਕਰਨ ਜਾ ਰਹੇ ਹਾਂ ਚੰਝੋਟੀ ਆਓ ਆਪਣੇ ਮਨ ਦੇ ਦਰਵਾਜ਼ੇ ਖੋਲ੍ਹਿਏ ਚੰਝੋੜੀਏ ਆਪਣੇ ਮਨ ਨੂੰ ਆਤਮਾ ਦੀ ਇਹ ਆਵਾਜ਼ ਜਿਹੜੀ ਸੱਚ ਨੂੰ ਪਛਾਨਣ ਲਈ ਬਾਰ-ਬਾਰ ਹੋਕਾ ਦਿੰਦੀ ਹੈ ਆਓ ਚੰਜੋਟੀ ਸਰਵਣ